अनुरोध जी को ब्याह कथनं सोइया तोही लो पौत्र को ब्याह कृपान श्याम पनय रजमान बेचारियो सुंदर थी रुक्मी की सुता ते ब्याह है को सब सासवारियो टीका दियो ते भार मै कुंकुम औ मिल बिपर्ण वेद उचारियो श्री जगदवीर त्रिया संग लै बलभद्र सो कौतिक काज सिधारियो चौपी किसन जवै ते पुर मै गए आतो रुकमन जब रुक्मिंदर सायो बहन प्राप्तत ही सुख पायो व्यापलो अनिरुद्ध को कयो जद पति आप सेरा दयो जूप मंत्र उत रुकम विचारयो खेल हली हम संग उचारयो सवैया संग हली के तवै रुक्मि कब श्याम जुआहु को खेल मचायो भूख ने जे थे तिन देखत दरबकनो ते माज रुक्मि हूं को दाव पर यो सुनायो हास कियो मिलकै अति गड़ड तो अज प्रात कनो रिस वायो चौपाई ऐसे कनी भेर दहकायो जात पद प्रात क्रोध अति आयो ए गदाउन कर्मै धरी सा की पूजा करी कने चाय सो भूप संगारे परे चूंके बहु बिसंभारे गिरेश रोन के रस सो खेड बसंत मनो मद गिरत पूसो ਸੋ महली जैसे अंतकाल शिव बलि जो रिस डांड लिए जव आवे तैसे ही मुसली छप पावे रुक्मि पयो गदा गै ठाडो कनो क्रोता कै चित बाढो भाज पयो ना साम आयो आए हली सो युद्ध मचायो हली गदा तब ता पर मारी उन्हों कोप सो ता पर चारी सरोण छुट्यो ਦੰਦ ਕਾੜ ਏਕ ਹਸਤ ਦੋ ਸੋਏ ਨੈਣ ਨਿਹਾਰੇ ਰੁਕਮ ਜਯਦ ਗੋ ਝੋਰ ਕੈ ਤਾ ਪਰ ਚਲਿਓ ਹਕਾਰ ਸਵਈਆ ਸਭ ਤੋਰ ਕੈ ਦਾਂ ਦੈ ਤਿਹ ਕੇ ਬਲ ਪੱਦਰ ਗਦਾ ਸੰਗ ਪੈ ਗਹਿ ਕੈ ਦੋ ਮੂਛੋ ਪਾਰ ਲਈ ਤਿਹ ਕੀ ਅਤ ਸਰਾਉਣ ਚਲਿਓ ਤਿਹ ਕੇ ਬਹਿ ਕੈ ਫਿਰ ਔਰ ਹਨੇ ਬਲਵੰਡ ਕਨੇ ਗਲ ਸ਼ਾਮ ਕਹਿ ਚਿਤ ਮੈਂ ਚਹਿ ਕੈ ਫਿਰ ਆਏ ਪ੍ਰਿਯੋ ਰੁਕਮੀ ਸੰਗ ਜੋ ਤੋਹ ਮਾਰਤ ਹਉ ਮੁਖਤੀ ਕਹਿ ਕੈ ਸਵਈਆ आपत भयो रुक्मि पै हली कब श्याम कह चित रोस बढे क रूं खरे कर कै अपने पुने और प्रचंड गदा कर ले कै आपत भयो ਸੋ सो ਸੋ सो आपस में रण दुंद मचाय कै होए बि संभार परे दो वीर धरा पर कायन के संग कै कै चौपी बाहर धोए कह युद्ध मचायो एक ना दो मैं मारन पायो ਬਿਹੇ ਬਲ ਹੋਏ ਦਉ ਤਰ ਪਰੇ ਜੀਵਤ ਬਚੇ ਸੋ ਮਨਉ ਮਰੇ ਮੁਛਤ ਵੈ ਫਿਰ ਜੁਦਮਚਾਇਓ ਕੌਤਕ ਸਭ ਲੋਕਨ ਦਰਸਾਇਓ ਕ੍ਰੋਧਤ ਹੋਏ ਸੋ ਯਾ ਬਿਦ ਅਰੇ ਕੀ ਹਰੀ ਦੋਏ ਜਨ ਬਨ ਮੈ ਲਰੇ ਸੋਈਆ ਜੁਦ ਬਿਖੈ ਥਕ ਗਿਓ ਰੁਗਮੀ ਤਬ ਧਾਇ ਹਲੀ ਇਕ ਕਾਇ ਚਲਾਇਓ ਤਉ ਉਨੂ ਅਰ ਕੋ ਪੁਨ ਕਾਇ ਸੋ ਮਾਰਗ ਮੈ ਲਖ ਪਾਇਓ ਤੋ ਹੀ ਸੰਭਾਰ ਗਦਾ ਆਪਣੀ ਅਰ ਚਿੱਤ ਵਿਖਾਇਆ ਤੇ ਰੋਸ ਵਢਾਇਓ ਸਿਉ ਤੇ ਵੀਰ ਤਵੈ ਸੋ ਗਦਾ ਕੋ ਗਦਾ ਸੰਘਾਏ ਬਚਾਇਓ ਸਵਈਆ ਸਿਉ ਪਨੈ ਅਰ ਕੋ ਜਬ ਹੀ ਆਪਤ ਘਾਇ ਕੋ ਵਿਚ ਨਿਵਾਰਿਓ ਤੋ ਬਲ ਭੱਦਰ ਮਹਾਰਿਸ਼ ਸੋ ਔਰ ਗਦਾ ਹੂ ਕੋ ਘਾਓ ਪ੍ਰਹਾਰਿਓ ਸੋ ਏਕੇ ਸਿਰ ਪੀਤਰ ਲਾਗ ਗਇਓ ਇਨਹੂ ਨਹੀਂ ਨਾਇਕ ਸੰਭਾਰਿਓ ਤੂੰ ਕਾ ਦੇਹ ਪਰਉ ਤਰਨੀ ਰੁਕਮੀ ਪੁਨ ਅੰਤ ਕੇ ਧਾਮ ਸਿਧਾਰਿਓ ਪ੍ਰਾਤਿਤੇ ਰੁਕਮੀ ਕੇ ਉਤੇ ਬਦ ਪ੍ਰਾਤ ਨਿਹਾਰ ਕਹਿ ਕਰੋਧ ਭਰੇ ਅੰਮਰਥੀ ਅਰਬਾਨ ਕਮਾਨ ਕਿਰਪਾਨ ਗਦਾ ਗਹਿ ਆ ਪਰਿਆਏ ਪਰੇ ਕਿਲਕਾਰ ਦਸੋ ਤੁਸ ਪੇ ਮੁਸਲੀ ਤਰਤੇ ਨਰਤੀ ਕੁ ਡਰੇ ਨਿਸਕੋ ਮਨੋਹੇਰ ਪਤੰਗ ਦੀ ਆ ਪਰ ਨੈਕ ਡਰੇ ਨਹੀਂ ਟੂਟ ਪਰੇ ਸੋਇਆ ਸੰਗ ਹਲਾ ਜੁਦ ਕੇ ਹਉਨ ਹੂ ਸਉ ਤੈ ਅਤਿ ਕ੍ਰੋਧ ਹੋਏ ਜੁਦ ਮਚਾਇਓ ਭਰਾਤ ਕੋ ਜੁਦ ਭਇਓ ਤ੍ਰੀ ਭਰਾਤ ਕੇ ਸੰਗ ਇਹੈ ਪ੍ਰਭ ਜੂ ਸੁਨ ਪਾਇਓ ਬੈਠ ਵਿਚਾਰ ਕਿਓ ਸਭ ਹੂ ਜੋ ਸਵੇ ਜਦ ਵੀਰ ਕੁਟੰਬ ਬੁਲਾਇਓ ਔਰ ਕਥਾ ਦੇ ਛੋਰ ਹਲੀ ਕੀ ਸਹਾਇ ਕਉ ਕੋਪ ਕਿਰਪਾ ਨਿਧਤਾਇਓ ਦੋਹਰਾ ਜਮ ਰੂਪੀ ਬਲ ਭਦਰ ਪੇਖ ਹਰਿ ਆਗਮ ਪਾਏ ਬੁੱਧਵੰਤਨ ਤੇ ਭਾਈ ਕਹੀ ਸੋ ਕਉ ਸੁਨਾਏ ਸੋਇਆ ਦੇਖ ਕਨੀ ਜਦ ਵੀਰ ਕਨੀ ਲੀਏ ਆਪ ਡਰ ਤੋ ਨ ਆਵੇ ਕੌਣ ਬੜੀ ਪ੍ਰਗਟਿਓ ਭੂਮੈ ਤੁਮਹੀਨ ਕਹੋ ਇਨ ਸੋ ਜੜ ਕੈ ਹੀ ਪਿਰਖੈ ਤੋ ਕਹਾ ਫਿਰ ਜੀਵਤ ਧੰਮ ਹੈ ਆਵੇ ਆਜ ਸੋ ਬਚ ਹੈ ਇਹੋ ਸਰਜੂ ਭਜ ਕੈ ਪਟ ਪ੍ਰਾਨ ਬਚਾਵੇ ਸਈਆ ਤੋ ਲਗੀ ਜਿਤ ਕੋ ਕਿਰਪਾ ਨਿਦ ਆਹਵ ਕੀ ਛਿਤ ਪੀਤਰ ਆਏ ਸਰਉਣ ਪਰਯੋ ਬਲ ਭੱਦਰ ਪਿਖਿਓ ਬਿਨ ਪ੍ਰਾਣ ਪਰੈ ਰੁਕਮੀ ਦਰਸਾਏ ਭੂਪਦੈ ਔਰ ਘਨੇ ਹੀ ਪਿਖੇ ਕਲ ਸ਼ਾਮ ਪਨਾਏ ਹਰਿਕਾਇਨ ਘਾਏ ਪ੍ਰਾਤ ਕਉ ਦੇਖ ਪਰਸਨ ਪੈ ਬਾਰਿ ਨਾਰ ਕੋ ਦੇਖਤ ਨੈਨ ਨਿਵਾਏ ਸਵਈਆ ਰਤ ਤੇ ਤਵੇ ਆਪੈ ਤਾਇ ਕੈ ਸਿਆਮ ਜਾਏ ਖਲੀਕਾ ਅੰਕ ਲਿਓ ਹੁਣ ਔਰ ਨ ਗਏ ਹੋ ਰੁਕਮੀ ਤੇ ਕੋ ਸੋ ਭੜੀ ਬਿਦਦਾਹ ਕੀਓ ਉਤ ਦੌਰ ਰਕਮਨ ਭਈਆਂ ਵਿਚ ਗਈ ਕਨ ਜਾਏ ਸਮੋਦ ਕੀਓ ਕਿਹ ਕਾਜ ਕਹਿਓ ਇਨਸੂ ਤੁਮ ਜੂਜ ਕੀਓ ਜਨਸੂ ਪਟ ਕੋ ਨ ਬਿਓ ਚਉਪਈ ਤਿਨ ਜੋ ਸ਼ਾਮ ਸਮੋਦਿਰਾਇਓ ਪੌਤਰ ਬਦੂ ਲੈ ਡੇਰਨ ਆਇਓ ਸ਼ਾਮ ਕਥਾ ਹਵੇ ਹੈ ਮੈਂ ਕਹਿਓ ਸਰੋਤਨ ਭਲੀ ਭਾਂਤ ਰਿਜਵੈ ਹੋਇਿਤ ਸ੍ਰੀ ਕ੍ਰਿਸ਼ਨ ਆਵਤਾਰੇ ਪੌਤਰ ਵਿਹਾਰ ਹੁਕਮ ਬਾਦ ਕਰਤ ਭੈ ਧਿਆਏ ਸਮਾਪਤ ਅਥ ਊਖਾ ਕੋ ਵਿਆਹ ਕਥਨੰ 10 ਸੈਂ ਪੂਜਾ ਕੋ ਗਰਭ ਹਰਨ ਕਥਨੰ ਚਉਪਈ जादपत पौत्र जहा कर आयो अच्चेत अपने हरख बढायो गर्भ उतै दस सै पुजकी नो मैं बर महारुद्र ते लीनो सवैया गाल बजाए पलीबे सोम वरताल सो, सो मेरे हाथ न दीनो जैसे लिखी विदभेद विकहते भूवत ही विदसो तपकीनो जग करे सब ही विद पूर्व कौन विधान बिना नहीं नो रुद्र रिजाए कहो ए पांत सो हो कुटवार ई ਸੁਵਿਆ ਰੂਦਰ ਜਵੈ ਕੁਟਵਾਰ ਕਹੋ ਤਬ ਦੇਸਨ ਦੇਸਨ ਧਰਮ ਚਲਾਇਓ ਪਾਪ ਕੀ ਬਾਤ ਗਈ ਛਪ ਕੇ ਸਭ ਹੀ ਜਗ ਮੈਂ ਜਸ ਭੂਪ ਦੀ ਛਾਇਓ ਸਤਰ ਤ੍ਰਿਸ਼ੂਲ ਕੇ ਪਾਸ ਭੈ ਹਰਿਓ ਕਿਹੁ ਨਹੀਂ ਸੀ ਸੂਠਾਇਓ ਲੋਗਨ ਤੌਣ ਸਮੈ ਜਗ ਮੈਂ ਕਬ ਸਿਆਮ ਪਨੈ ਅਤਿ ਸੁਖ ਪਾਇਓ रुद्र प्रताप है हरि बस किहु हरियान नासी सो ठायो कर लाये कब श्यामपन ए पायर ऊपर शीश झुकायो भूप रंचक बात नहीं ए पौरख मेरो ही है लख पायो पौरख पयो पूज दंदन रुद्र ते जोधी को वर मांगन थायो सोर ठा था। मूर्ख लहो न भेद युद्ध से पै चलयो कर बिरथा सब खेद राव तप बारू तपै ਨਿਰਪਵਾਤ ਰੁਦਰ ਸੋ ਸੋਈਆ ਸੀਸ ਨਿਵਾਇ ਕੈ ਪ੍ਰੇਮ ਵਢਾਇ ਕੈ ਜੋ ਨਿਰਪਰੁਦਰ ਸੋ ਬਹਿਨ ਸੁਨਾਵੈ ਜਾਤ ਹੋ ਹੋ ਜੇ ਸਤੁਰ ਪੈ ਰੁਦਰ ਜੂ ਕੋ ਤੇ ਹਾਥ ਉਠਾਵੈ ਤਾ ਤੇ ਅਯੋਧਨ ਕੋ ਹਮਰੋ ਕਵ ਸਿਉ ਕਹੇ ਮਨੁ ਲਚਾਵੈ ਚਾਹਤ ਹੋ ਤੂੰ ਤੇ ਬਰਿਆਜ ਕੋ ਹਮਰੇ ਸੰਗ ਜੂਜ ਮਚਾਵੈ ਰੁਦਰ ਨਿਰਪ ਸੋ ਚਉਪਈ ਯੋ ਸੁਨ ਕੇ ਸ਼ਿਵ ਕ੍ਰੋਧ ਵਡਾਯੋ ਯੋ ਕਹਿ ਕਹਿ ਤੇਹ ਬਚਨ ਸੁਨਾਯੋ ਜਵੈ ਤੁਜਾ ਤੂਰੀ ਘਿਰ ਪਰ ਹੈ ਤਵੈ ਸੂਰ ਕੋ ਤੁਮ ਸੰਗ ਲਰ ਹੈ ਸਵਈਆ ਹਵੈ ਕਰ ਕਰੋ ਜਵੈ ਸ਼ਿਵ ਜੂ ਤੇ ਭੂਵਤ ਕੋ ਤਿਨ ਬੈਨ ਸੁਨਾਯੋ ਭੂਵ ਲਖਿਓ ਨਾ ਭੇਤ ਕਛੂ ਸੋ ਲਖਿਓ ਚਿਤ ਚਾਹਤ ਹੋ ਸੋ ਪਾਇਓ ਬਾਗੇ ਗ ਭੀਤਰ ਭੂਲ ਗਇਓ ਪੂਜ ਦੰਡਨ ਕੋ ਅਤਿਯੋਜ ਜਨਾਯੋ यो दस सहै कोई श्याम कहे अति आनंद सो फिर मंदर आयो एक हुती दोहताते कीते सोत निसा सुपनो इक पायो मान से रूप अनूप सी मूर्त सोए के चल मंदर आयो भोगियो ते सो मिलकै इन चित्त बिखै अति सुख पायो चौक परी नहीं पीय पिखयो पी कब श्याम कहे तिन सोख जनायो सवैया जागत ही बिर लाभ की ओ अति चित्त शोक की बात जनाई अंगन में डगरी सी फिरे पतकी कर कै मन में सुचताई प्रीत लगयो किदो प्रीत लगी के कछु अविया ठगमोरी सी खाई पाखत पी सकी मोह ਇਤਿ ਕੈ ਬਤਿਆ ਮੁਖ ਤੇ ਗਿਰ ਭੂਪੈ ਭਰੀ ਸਭ ਸੁਧ ਭੁਲਾਈ ਜੋਬ ਸੰਭਾਰ ਪਰੀ ਧਰਨੀ ਕਬਸਾਮ ਪਨੈ ਮਨੋ ਦਾਗਨ ਖਾਈ ਮਨਾਂਤ ਸਮੇ ਪਹੁੰਚੋ ਏ ਦੇਗੋ ਪ੍ਰੀਤਮ ਸੋਤ ਦਿਖਾਈ ਤਉ ਲਗ ਚਿੱਤਰ ਰੇਖਾ ਜੋਤੀ ਸੋ ਸਕੀ ਇਹ ਕੀ ਏਕੀ ਢਿਗ ਆਈ ਚੌਪੀ ਸਖੀ ਦਸਾ ਜਬ ਜੈ ਸੁਨਾਈ ਚਿਤ੍ਰ ਰੇਖ ਤਬ ਸੋਚ ਜਨਾਈ ਇਹ ਜੀਐ ਜੀ ਹੋ ਨਹੀ ਮਰਹੁ ਜਾਣ ਤ ਜਤਨ ਏਕ ਸੋ ਕਰਹੁ ਜੋ ਮੈਂ ਨਾਰਦ ਸੋ ਸੁਨ ਪਾਜੋ ਵਹਿ ਜਤਨ ਮੇਰੇ ਮਨ ਆਇਓ ਸੋ ਮੈਂ ਕਰਹੁ ਬਾ ਨਾਸੁਰ ਤੇ ਨੈਕ ਨਾ ਡਰਹੁ ਸਖੀ ਬਾਤ ਚਿਤ੍ਰ ਸੋ ਦੋਹਰਾ ਆਤ ਰੁ ਤੇ ਕੀ ਸਕੀ ਤੇ ਕੋ ਕਹੋ ਸੁਨਾਏ योग जानत है यतन तू सो अब तुरत बनाए सोइया जो सुन कै तहकी बतिया तब ही ए 14 लोक बनाए जीव जनावर देव निसाचर पीत के बीच लिखे चित लाए और सबय रचना जग हुकी लिखी कह लो कव श्याम सुनाए तो ए आए स्मुछत कै बहिया गए या सब ਜੋ ਵਹੀ ਆਗਹਿ ਕਹਿ ਇਹ ਕੀ ਉਨ ਚਿਤ੍ਰ ਸਵੈ ਇਹ ਕਹਿ ਦਰਸਾਏ ਦੇਖਤ ਦੇਖਤ ਗੀਤੇ ਠਾਂ ਜਹਦਵਾਰ ਮਤੀ ਬ੍ਰਿਜਨਾਥ ਬਨਾਏ ਸੰਬਰ ਕੋ ਅਰਥੋ ਜੇ ਠੌਰ ਲਿਖਿਓ ਇਹ ਤਾ ਪਿਖ ਨੈ ਨਿਵਾਏ ਤਾ ਸੋਏ ਦੇਖ ਕਹਿ ਹੋਇ ਭਾਂਤ ਸਹੀ ਮੇਰੇ ਪ੍ਰੀਤਮ ਇਹ ਸਹੀ ਪਾਏ ਚਉਪਈ ਕਹਿ ਸਕੀ ਅਬ ਠੀ ਨ ਕੀਜੈ ਪ੍ਰੀਤਮ ਹੋਇ ਮਿਲਾਏ ਕਹਿ ਦੀਜੈ ਜਬ ਸਜਨੀ ਇਹ ਕਾਰਜ ਕਹਿ ਹੋ ਜੀਵਦਾਨ ਤਬ ਮੋ ਕਉ ਦੈ ਸੋਇਆ ਯੋਵਤਿਆ ਸੁਨ ਕਹਿ ਪਈ ਚੀਲ ਚੱਲੀ ਉੜ ਦੁਆਰਵਤੀ ਮਹ ਆਈ ਪੌਤਰੂਹ ਤੋ ਜੇ ਸਿਆਮ ਜੂ ਕੋ ਛਿਪ ਸਿਆਮ ਪਨੈ ਤੇ ਬਾਤ ਸੁਨਾਈ ਏਕ ਤਰੀਆ ਅਟਗੀ ਤੁਮ ਪੈ ਤੁਹੇ ਲਾਇ ਬੇਕੇ ਚਲੋ ਥਾ ਬੇਗ ਬੁਲਾਇ ਲਿਓ ਮੇੜ ਸਵੈ ਚਿਤ ਦੁਚਿਤਾਈ ਸੋਇਆ ਬੈਨ ਸੁਨਾਏ ਕੈ ਸਿਆਮ ਪਨਾਏ ਤੇ ਆਪਨੋ ਰੂਪ ਪ੍ਰਤੱਚ ਦਿਖਾਇਓ ਜੋ ਤ੍ਰੀਮੋ ਪਰ ਹੈਟ ਪੀਂ ਤੇ ਜਾਏ ਪਿਖੋ ਮਨ ਜਾਏ ਲੁਭਾਇਓ ਖੈਂ ਜਨ ਖੰਗ ਵਸਿਓ ਕਟਸੋਂ ਤੁਹਾਨੂੰ ਲੈ ਚਲ ਬੇਕੋ ਸਾਜ ਬਨਾਇਓ ਦੂਤੀ ਕੋ ਸੰਗ ਲੈ ਆਪਣੇ ਇਹ ਤਾਤਰੀਏ ਲਿਆ ਮਨ ਕਾਿ ਸਿਧਾਇਓ ਦੋਹਰਾ ਸੰਗ ਲੈਓ ਅਨਰੁੱਧ ਕੋ ਦੂਤੀ ਅਰਖ ਵਡਾਏ ਊਖਾ ਕੋ ਜਹਾਂ ਤਾਂ ਪਹੁੰਚਿ ਆਏ ਸੋਰਟਾ त्रिपी दयो मिलाए चतुर्त्रियाकर चतुर्ता कियो भोग सुख पाए भूखा अर अनिरुद्ध मिल सोइया चार प्रकार को उपहो कियो नर नार हूलास ही है मैं बढा के आसन कोके बी जते एक विभागत है सो सब इन क कह ज्यों हमरी तुम होए री सुंदर त्यो हमहू तुमरे रहे हवे कै सुन्दर थी जो तुजा निरुपकी सो गिरी भूपै लख भूपति पायो जो वरदान दयो महरुद्र वह प्रगट्यो चितमय सो जन आयो तोहि लवाए कहि एक यो तुमरी दोताग्रह मोको आयो यो नित बात सुन कै अपने चितमय अति बढायो ਸੁਈਆ ਆਵਤ ਹੀ ਕਰ ਸ਼ਸਤਰ ਸੰਭਾਰਤ ਕੋਪਿਓ ਚਿਤਰੋਸ ਵਢਾਇਓ ਕਾਨ ਕੇ ਪੋਤਰ ਸੋ ਸਿਆਮ ਪਨੈ ਦੋਤਾਉ ਕੇ ਮੰਦਰ ਜੁਦ ਬਚਾਇਓ ਹੋਏ ਵਿਸੰਭਾਰ ਪਰਿਓ ਜਬ ਸੋ ਤਬ ਹੀ ਏਕ ਕਰ ਪੀਤਰ ਆਇਓ ਨਾਦ ਬਜਾਏ ਦਿਖਾਇਆ ਸਭ ਬਨ ਲੈ ਏਕੋ ਕਾਨ ਕੇ ਪੋਤਰ ਕੋ ਬਾਦ ਕਹਿ ਭੂਪ ਫਿਰ ਨਾਰਦ ਜੈ ਸੁਨਾਈ ਕਾਣ ਤੇ ਲੋਠ ਬੈਠੇ ਕਾ ਆਪਣੀ ਜਦਵੀ ਸਭ ਸੈਨ ਬਨਾਈ ਯੋ ਸਨ ਸਿਆਮ ਚਲੇ ਬਤੀਆ ਆਪਣੇ ਚਿਤ ਮੈਤ ਅਤ ਪ੍ਰੋਧ ਸ਼ਸਤਰ ਸੰਭਾਰ ਸਵੈਰ ਇਸ ਜਿਨ ਕੋ ਅਸ ਤੇਜ ਲਖਿਓ ਨਹੀਂ ਜਾਈ ਦੋਰਾ ਬਤੀਆ ਸੁਨ ਮਨ ਕੀ ਸਗਲ ਜਤਪਤ ਸੈਨ ਬਨਾਏ ਜਾ ਭੂਪਤ ਕੋ ਪੁਰਵ ਤੋ ਆਏ ਸੋਈਆ ਆਵਤ ਸਿਆਮ ਜੀ ਕੋ ਸੁਣ ਕੈ ਨਿਰਭਉ ਮੰਤਰ ਪੁਛਿਓ ਤਿਨ ਮੰਤਰਨ ਦੀਨੋ ਏਕ ਕਹੀ ਹਮ ਜੋਦੋ ਤਾ ਇਹ ਦੈ ਸੋ ਕਹੋ ਤੋਹਿ ਮਾਨ ਨ ਲੀਨੋ ਮੰਗ ਲਿਓ ਸਿਵ ਹੈ ਤੂੰ ਭਇਓ ਛੋਰ ਹੋ ਦ્વੈ ਕਰ ਕੈ ਕਰਿਆਜ ਸੋ ਸ੍ਰੀ ਬ੍ਰਜਨਾਥ ਹੈ ਪ੍ਰਾਨਕੀਨੋ ਸੋਈਆ ਮਾਨੋ ਤੋ ਬਾਤ ਕਹੋ ਨਿਰਪੀਕ ਜੋ ਸਰੌਨਨ ਮੈਂ ਹਿਤ ਕੈ ਧਰਿਐ दोता अनुरोध को लै अपने संग श्याम के पायन पै परियै तुमरे निरप पाए परै सुनियै नहीं श्याम के संग कवै लरियै अर हो न जो श्याम पन है हरसो भूपै तब राज सदा करियै सुइया श्री बृज नायक जो रिस कै रण में कर जो धन सारंग लै है कौन बलि प्रगटौ भूपै तुनु न कहौ पर ਜੋ ਹਟਕੈ ਫਿਰ ਹੈ ਤੇ ਸੋ ਤੇ ਕੋ ਛਿਨ ਮੈਂ ਜਮ ਲੋਕ ਪਠਾਇ ਹੈ ਔਰ ਪੁਜਾ ਕਟ ਕੈ ਤੁਮਰੀ ਸਭ ਦੁਐਪਜ ਰਾਖ ਤਵ ਪ੍ਰਾਨ ਬਚੈ ਹੈ ਸੋਈਆ ਮੰਤਰੀ ਕੀ ਬਾਤ ਨਾ ਮੰਨ ਭਇਓ ਨਿਰਵਿਆਪਨੋ ਓਜ ਅਖੰਡ ਦਿਨ ਆਇਓ ਸਸਤਰ ਸੰਭਾਰ ਕੈ ਹਾਥਨ ਮੈਂ ਉਪਨ ਵੀਰ ਨਵਾਤੀ ਗਰਬਾਇਓ ਸੈਨ ਪਰ ਚਾਂਡੂ ਤੋ ਜਤਨੋ ਤਿਸ ਕਾਉਨ ਰੁਪੇ ਆਪਣੇ ਧਾਮ ਬੁਲਾਇਓ ਰੁਦਰ ਮਨਾਇ ਜਨਾਇ ਘਰੋਂ ਬਲ ਸ਼ਾਮ ਜੂ ਸੋ ਲਰ ਬੇ ਕਹਉ ਧਾਇਓ ਉਤ ਸ਼ਾਮ ਜੂ ਬਾਣ ਚਲਾਤ ਭਇਓ ਉਤ ਤੇ 10 ਸੈ ਭੁਜ ਬਾਣ ਚਲਾਏ ਜਾਤ ਵਿਆਪਤ ਭੇ ਉਤ ਤੇ ਇਤ ਤੇ ਇਨਕੇ ਸਭ ਹੀ ਭਟ ਧਾਏ ਕਾਇ ਕਰੈ ਮਿਲ ਆਪਸ ਮੈਂ ਤਿਨ ਜੋਗ ਕਮਾ ਕਲ ਸੁਨਾਏ ਮਨੋ ਭਾਗਨ ਕੀ ਰੁਧ ਵੀਰ ਬ ਆਏ ਸਵਈਆ ਏਕ ਪ੍ਰੇ ਕਰਵਾਰਨ ਸਉ ਭਟ ਏਕ ਫਿਰੇ ਵਰਛੀ ਕਰ ਲੈ ਕੈ ਏ ਕਟਾਰ ਨੂੰ ਸੰਗ ਰੇ ਕਬ ਸਿਉਂ ਭਨਾਇ ਅਤਿ ਰੋਸ ਵਢਾਇ ਕੈ ਬਾਹਰ ਕਮਾਨਨ ਕਉ ਇਕ ਬੀਰ ਸਮਾਰਤ ਪੇ ਅਤਿ ਕ੍ਰੋਧਤ ਕੌਤਕ ਦੇਖਤ ਪ੍ਰਯੋਤ ਪੂਪ ਇਤੈ ਬ੍ਰਿਜ ਨਾਇਕ ਆਨੰਦ ਕਹਿ ਕੈ ਸਵਈਆ ਜਾ ਪਟ ਆਹਵ ਮੈਂ ਕਬ ਸਿਉਂ ਭਗਵਾਨ ਸੇ ਜੁਦ ਮਚਾਇਓ ਤਾਹੀ ਕੋ ਏਕੀ ਸੋ ਸਿਆਮ ਧਰਾ ਪਰ ਕੈ ਬਿਨ ਪ੍ਰਾਨ ਗਿਰਾਇਓ ਜੋ ਤਨ ਬਾਣ ਸੰਭਾਰ ਬਲੀ ਕੋ ਓ ਏਕੇ ਰਿषि ਉਪਰ ਆਇਓ ਸੋ ਕਵ ਸਿਆਮ ਪਨੇ ਆਪਣੇ ਗ੍ਰਹਿ ਕਉ ਫਿਰ ਜੀਵਤ ਜਾਨ ਨਾ ਪਾਇਓ ਸੋਈਆ ਗੋਕਲ 나ਜੂ ਬੈਰਨ ਸੋ ਕਬ ਸਿਆਮ ਪਨੇ ਜਬ ਜੇਤਕ ਸਤਰਨ ਸਾਮੈ ਭੇਰ ਰਿਸ਼ ਸੋ ਸਭ ਗਿੱਧ ਸਿਰ ਗਾਲਨ ਬਾਂਡਿਓ पतर्थी थी गजबाज कने बिन प्राण किए को जीत ना देव सरात पे सब ही सो भले भगवान अखंडन खांड्यो जीते सबै पै पीत भय तज आवको सब ही पटभागे ठाडो बना सुरथो जे ठोर सबे चल कहते ते लागे छूट गयो सबहु ते धीर देव त्रासै के रसमय अनुरागे ਪਾਖਤ ਪੇ निरसोपजिय बज है न को बृजनाथ के आगे तीर परी जाप उपत पै तवे अपने जान के ईस निहारयो संत सहाय को जाय प्रियो बृजनायक सो चित बीज विचारयो आज दले अपने सब ही हरि ओर सो जद्द के काज सिधारयो आपत ही सो कहो अब हो जे भांत दुहु के ठां रुद्र है रुद्र जब रण में कंव स्यों पणै रसनाद बजायो सूर न काहू ते नेक टिक्यो गयो पाज गए नर ती के दू शत्रुन संग लै सो सो डर पायो श्री बृजनाथ सो स्यों पणै जब ही शिव आए कह युद्ध मचायो सोइया जे सब काए चलावत भयो शिव ते सब ही बृजनाथ बचाए ਤੋਂ ਸਮੈ ਸਿਵ ਕੋ ਆਪਣੇ ਤਕ ਸਿਆਮ ਪਨ ਤੱਕ ਘਾਇ ਲਗਾਏ ਜੁਦ ਕੀਓ ਬਹੁ ਪਾਦੂ ਜਿਹ ਕੋ ਸਭ ਹੀ ਸੁਰ ਦੇਖਣ ਆਏ ਅੰਤ ਖਸਾਇ ਰਸਾਇ ਕਿਰਪਾ ਨਦੀ ਏਕ ਗਦਾਹੂ ਸੋ ਰੁਦਰ ਗਿਰਾਏ ਚੋਬਈ ਜਬ ਰੁਦਰ ਹਰਿ ਘਾਇ ਲਗਾਇਓ ਬਿਸਦੋ ਕਰ ਕਰ ਭੂਮ ਗਰਾਇਓ ਸੰਕਤ ਭੈਵਨ ਫਿਰ ਤਨ ਸ੍ਰੀ ਜਤ ਸਹੀ ਪ੍ਰਭ ਜਾਨਿਓ ਸੋਰਠਾ रुद्र कोप दयो त्याए जद पद कोबर हेर कै पाइन लाग्यो आए रहो चरण गै हर दूसोइया रुद्र की टेक त शाए भात सो वा पह जूद को पूब दायो स्याम पने दासे भुज श्याम के पूपर बाणन ओग चलायो ओग जो आवत मानन को सभी हरि मार्ग में निभरायो सारंग आपन हाथ बिखए धरकै अर कोप बहु काण घायो श्री बृज नायक ਹੋਏ होए अपने कर में धनु सारंग लेकै युद्ध मचावत भयो दस सै पुजे सोवती ओज अखंड जनकै और हने बलवंत कने कल श्याम पनात पौरख कह कह छोर दयो ते पूप्त को रण में ते की सो पूजा फुन द्वयक है कब बा इसैया भास हंसर कहो तुमरी अब ਔਰ ਕਹੋ ਏ ਪੂਪਤੀ ਆਪਣੈ ਗ੍ਰਹਿ ਭੀ ਸੰਪਤ ਸਮੋਈ ਏਤੇ ਪੈ ਸੁਨੋ ਹਿਤ ਕੈ ਸਿਵ ਸੋ ਛਰਿਆ ਪੁਨਰਾਖਦ ਕੋਈ ਤਾ ਨਿਰਪਕੋ ਵਰਜਾ ਬਿਦੀਸ ਦਇਓ ਜਗਦੀਸ਼ ਕੀਓ ਭੈਓ ਸੋਈ ਚਉਪਈ ਜਬ ਤੇ ਮਾਇ ਬਾਸ ਸੁਪਾਈ ਜੀਤਿਓ ਜਦੁ ਰਾਈ ਤਜ ਬਸਤਰ ਲਗਨ ਹੋਇ ਆਈ ਆਏ ਸਿਆਮ ਕੋ ਦਈ ਦਿਖਾਈ ਚਉਪਈ ਤਾਉ ਪ੍ਰਾਪ ਦ੍ਰਿਗ ਨੀਚੇ ਹੋਇ ਰਹਿਓ ਨਾਇਕ ਨਾ ਜੂਜਵ ਮੋ ਚਹਯੋ ਭੂਪਤ ਸਮੈ ਭਜਨ ਕੋ ਪਾਇਓ ਭਾਜ ਗਯੋ ਨਹਿ ਜੁਦ ਮਚਾਇਓ ਨ੍ਰਿਪ ਬਾਜ ਬੀਰ ਸੋ ਸਵਈਆ ਵਿਪਤ ਹੋਇ ਬਹੁ ਖਾਇਨ ਸੋ ਨ੍ਰਿਪ ਬੀਰਨ ਮੈਂ ਇਹ ਪਉ ਤੂ ਚਾਰਯੋ ਕਉ ਨ ਸੂਰ ਟਿਕਿਓ ਮੋਏ ਅਗਰ ਦੇ ਹਉ ਜੇ ਕੀ ਰਸੂਰ ਗਾਜ ਬੋ ਮੋ ਸੁਨ ਕੈ ਅਬ ਲੋਕ ਕਿਨੂ ਕਰਮੈ ਨੇ एते पैमो मो सं आए सो सही बृज नायक वीर निहारयो सोइया श्री जद वीर ते जो सहस्र पूजे भाज गयो नह युद्ध मचायो द्वै पूज देख भई अपनी अपने चित मैं अत त्रास मडायो सो जग म जस लेत पयो जिन श्री बृज नाथ है को गुण गायो तो ही जथा मत संत प्रसाद यो कह कह कज श्याम सुनायो ਆਪ ਦਾ ਭਇਓ ਰਿਸ ਕੈ ਸਿਵ ਜੂ ਫਿਰ ਆਪਣੇ ਸੰਗ ਸਭਾ ਗਨ ਲੈ ਕੇ ਸਾਹਮੈ ਵੀਰ ਕਹਿ ਕਲ ਸਿਆਮ ਸੋ ਕੁਰਤ ਤੁ ਹੈ ਕਹਿ ਬੌਨ ਕਿਰਪਾਨ ਗਦਾ ਵਰਛੀ ਕਹਿ ਆਪਤ ਪੈ ਰਿਸ 나ਦ ਕੈ ਸੋ ਛਿਨ ਮੈ ਪ੍ਰਭ ਸਭ ਵੀਰ ਦਇ ਹੁਨ ਕੇ ਧਾਮ ਪਠੈ ਕੈ ਸੋਇਆ ਏਕ ਨੇ ਜਿਦ ਰਾਏ ਗਦਾਗ ਹੈ ਏਕ ਬਲੀ ਰਿਬ ਸੰਬਰ ਘਾਏ ਏਕ ਪਿਰੇ ਮੁਸਲੀ ਧਰ ਸੋ ਸੋ ਤੋ ਜੀਵਤ ਧਾਮ ਹੂੰ ਜਾਨ ਨ ਪਾਏ ਜੋ ਫਿਰ ਆਏ ਪਿਰੇ ਹਰ ਸੋ ਚਿਤ ਮੈ ਫੁਨ ਕੋਪ ਕੀ ਓਪ ਵਢਾਏ ਯੋ ਫਿਰ ਛੇਦ ਪਿਓ ਤਿਨ ਕੋ ਜੋ ਜੰਬੁਗੀ ਦੀਨ ਹਾਥ ਨਾ ਆਏ ਐਸੋ ਨਿਹਾਰ ਪਿਓ ਤਾ ਆਵ ਚਿਤ ਵਿਖੈਤ ਕਰੋਧ ਵਢਾਯੋ ਠੋਕ 부ਜਾਇ ਆਪਣੀ ਦੁਆਪੀ ਹਾਥ ਲੈ ਆਪਣਾ ਨਾਦ ਬਜਾਇਓ ਜੋ ਕਪ ਬਯੰਦਕ ਦੈਤ ਮਹਿ ਤਾਬਦ ਭਯੋ ਤਿਮ ਕੋਪ ਕੈ ਸਿਆਮ ਪੈ ਧਾਇੋ ਜੋਪ ਜੀ ਉਪਮਾ ਨਰ ਬੇ ਕਉ ਕੇ ਹਰੀ ਹੋ ਜਨ ਕੇ ਹਰੀ ਆਇਓ ਮੰਡਿਓ ਵਤ ਹੀ ਤਬ ਸਿਵ ਤਾਪ ਤੋ ਇਕ ਸੂ ਸੰਭਾਰਿਓ ਸਿਆਮ ਜੂ ਭੇ ਸਬੈ ਲਹਿ ਕੈ ਜੁਰ ਸੋ ਤਾਹੀ ਕੀ ਔਰ ਪਚਾਰਿਓ ਦੇਖਤੀ ਜੁਰ ਸੀਤ ਸੋ ਜੁਰ ਭਾਜ ਗਇਓ ਨਰ ਤੀਕ ਸੰਭਾਰਿਓ ਯੋਗ ਮਾ ਉਪਦੀ ਜੀ ਮੈਂ ਬਦਰਾ ਬਹਿ ਉਹ ਪਿਆਰ ਕੁ ਮਾਰਿਓ ਸਵਈਆ ਗਰਭ ਜਤੋ ਸ਼ਿਵ ਵੀਚ ਤੋ ਸਭ ਹੀ ਹਰ ਕ੍ਰੋਧ ਕਹਿ ਜੁਦ ਮਿਟਾਇਓ ਨਾ ਭੇਟਣ ਪਾਇਓ ਔਰ ਜਿਤੇ ਗਨ ਸੰਗੂ ਤੇ ਸਭ ਕੋ ਹਰ ਕਾਇਕ ਨੇ ਸੰਘਾਇਓ ਐਸੋ ਨਿਹਾਰ ਕੈ ਪੌਰਗ ਸ਼ਾਮ ਗਣਪਤੀ ਪਾਏਨ ਸੋ ਲਪਟਾਇਓ ਸ਼ਿਵ ਬਾਜ ਸਵਈਆ पूर प्रयो प्रम मै घट कियो तुम सो जो पै युद्ध चाहो तू कहा पयो जो से आए प्रयो तू कहां मेरो मान रहो। तुमरे गुण गावत ही सासवन औ चतुरा ननहार रहयो तुमरे गुण कौन गन कह लो जे भेद सके न भेद कहो खमयो बाईश्वैया ਕਾ ਪਇਓ ਜੋ ਤਰਮੂਡ ਜਟਾ ਸੋ ਤਪੋ ਧਨ ਕੋ ਜਗ ਭੇਖ ਦਿਖਾਇਓ ਕਾ ਪਇਓ ਜੋ ਕੋ ਲੋ ਚਰਮੂਡ ਭਲੀ ਬਿਦ ਸੋ ਹਰ ਕੇ ਗੁਣ ਗਾਇਓ ਔਰ ਕਹਾ ਜੋ ਪੈ ਆਰਤੀ ਲੈਕਰ ਧੂਪ ਜਗਾਏ ਕੈ ਸੰਖ ਸਿਆਮ ਕਹਿ ਤゥム ਨਾ ਕਹੋ ਬਿਨ ਪ੍ਰੇਮ ਕੇ ਬ੍ਰਿਜ ਨਾਇਕ ਪਾਇਓ ਤਿਓ ਚਤੁਰਾਨਨ ਤਿਓ ਖੜਾਨਨ ਤਿਓ ਸਾਹਸਾਨਨ ਹੀ ਗੁਣ ਗਾਇਓ ਨਾਰਦ ਸ਼ੱਕਰ ਸਦਾ ਸਿੰਘ ਵਿਆਸ ਇਤੋ ਗੁਣ ਸਿਆਮ ਕੋ ਕਾਇ ਸੁਨਾਇਓ ਚਾਰੋ ਹੀ ਬੇਦ ਨਾ ਭੇਦ ਲਿਓ ਜਗ ਖੋਜਤ ਹੈ ਸਭ ਪਾਰ ਨਾ ਪਾਇਓ ਸਿਆਹ ਪਨੈ ਤੁਮ ਹੀ ਨਾ ਕਹੋ ਬਿਨ ਪ੍ਰੇਮ ਕਿਉ ਬ੍ਰਿਜਨਾਥ ਲਿਜਾਇਓ ਸਿਵ ਬਾਜ ਕਾਨ ਸੋ ਸੁਈ ਜਾ ਪਾਇ ਪਰਿਓ ਸਿਵ ਜੂ ਹਰ ਕੇ ਕਹਿਓ ਮੋ ਬਿੰਤੀ ਹਰ ਜੂ ਸੁਨ ਲੀਜੈ ਸੇਵਕ ਮੰਗ ਤਹਾਏ ਪਰ ਏਕ ਵਹਿ ਅਬਰੀ ਦਇਆ ਨਿਦ ਦੀਜੈ ਹੀਰ ਖਮੈ ਕਬ ਸਿਆਹ ਪਨੈ ਕਬ ਹੋ ਕਰਨਾ ਰਸ ਕੇ ਸੰਗ ਭੀਜੈ बाहे कटी ससरा पुज की तु भलो तह को अब न ना की कीजे कान जु बाच सुइया सो करहो अब हो सुन रुद्र जू तो संग बैनो चारथ हो बाहे कटी ते पूर निहार अब हौ सो क्रोध हो प्रहलाद को पोत्र कहावत है सोए जी माहे विचारथ हो ताते डंड ही दय छोर दयो एते नहताए हो सुइया ਯੋ ਬਖਸੈ ਕਹਿ ਸ਼ਿਆਮ ਜੂ ਸੋ ਤਿਹ ਭੂਪ ਕੋ ਸ਼ਿਆਮ ਕੇ ਪਾਇਨ ਡਾਰੋ ਭੂਲ ਕਹਿ ਭੂਪ ਪਦ ਕਾਮ ਕਰਿਓ ਅਭੇ ਪ੍ਰਭ ਜੂ ਤੁਮ ਕਰੋਧ ਦੋਤਾ ਸੰਗ ਔਰ ਕਛੂ ਮਨ ਮੈਂ ਨਾ ਵਿਚਾਰੋ ਜੋ ਕਰ ਵਿਆਹ ਸੰਗ ਊਖਾ ਲੈ ਅਨਿਰੋਧ ਕੋ ਸ਼ਿਆਮ ਜੂ ਸਿਧਾਰੋ ਸੁਰਿਆ ਜੋ ਸੁਨ ਹੈ ਗੁਰ ਸ਼ਿਆਮ ਜੂ ਕੇ ਫੁਨਿ ਔਰਨ ਕੇ ਅਰੇ ਆਪਨ ਹੈ ਆਪਣ ਜੋ ਪੜ੍ਹ ਹੈ ਪੜਵਾਏ ਹੈ ਔਰ ਕਵਿੱਤਨ ਬੀਜ ਬਨਾਇ ਹੈ ਸੋਤ ਜਾਗਤ ਤਾਪਤ ਤਾਮ ਸੋ ਸ੍ਰੀ ਬ੍ਰਿਜਨਾਇਕ ਕੀ ਸੁਦ ਲੈ ਹੈ ਸੋ ਸਦਾ ਕਲ ਸਿਆਮ ਪਨੁ ਫੁਨ ਜਾ ਭਵ ਪੀਤਰ ਭੇਰਨ ਹੈ ਹੈ ਇਤ ਸ੍ਰੀ ਦਸ਼ਮ ਸਕੰਧ ਪੁਰਾਣੇ ਵਿੱਚਤਰ ਨਾਟਕ ਕ੍ਰਿਸ਼ਨ ਅਵਤਾਰੇ ਬਾਨਾਸੁਰ ਕੋ ਜੀਤ ਅਨਿਰuddh ਊਖਾ ਕੋ ਵਿਆਹ ਲਿਆਵਦ ਭੈ